ਵਡਭਾਗੀ ਉਨਮਾਨਿਓ ਰਿੱਧ ਸ਼ਬਦ ਵਸਾਇਓ ਮਨ ਮਾਨਕ ਸੰਤੋਖਿਓ ਗੁਰਨਾਮ ਦਿਰੜਾਇਓ ਵਡਭਾਗੀ ਦੀ ਲਖ ਵਡਭਾਗੀ ਵਡਭਾਗੀ ਹਾਂਜੀ ਹੂੰ ਹੂੰ ਵਡਿਆ ਭਾਗਾ ਕਰਕੇ ਹੂੰ ਹੂੰ ਉਹਨਾਂ ਬਨਿਓ ਹੂੰ ਬਨ ਬਨ ਗਿਆ ਉਲਟਾ ਚੱਲਣ ਨੂੰ ਬੰਦ ਗਿਆ ਹੂੰ ਸੰਸਾਰ ਨੂੰ ਝੱਟਣ ਨੂੰ ਬੰਦ ਬੰਦ ਗਿਆ ਆਪੇ ਕਾਹਦੇ ਮੰਨੇ ਆ ਰੇਤੇ ਸ਼ਬਦ ਬਿਥਾਇਓ ਜਾਂ ਸ਼ਬਦ ਨੂੰ ਇੱਡੇ ਲਿਆ ਤਾਂ ਬਿਲਕੁਲ ਬੰਦ ਗਿਆ ਹਾਂਜੀ ਮਨਮਾਨ ਮਨਮਾਨ ਸੰਤੋਖਿਓ ਹਾਂਜੀ ਕੋਈ ਨਾਮ ਲੜਾਇਓ ਇਹਦਾ ਮਨਮਾਨ ਤੁਸੀਂ ਤਾਂ ਹੂੰ ਸਤੋਕ ਹੋ ਗਿਆ ਹੂੰ ਹੂੰ ਜਦ ਮਨ ਬਾਣਕ ਹੋ ਜਾਂਦਾ ਹੈ ਸਤੋਕ ਹੋ ਜਾਂਦਾ ਹੈ ਹੂੰ ਵੀ ਨਹੀਂ ਤਾਂ ਪੱਥਰ ਹੈ ਬਸ ਸੱਟਣ ਵਾਲਾ ਹੀ ਹੁੰਦਾ ਮਨ ਬਾਣਕ ਹੋ ਗਿਆ ਇਹਦਾ ਮਤਲਬ ਹੈ ਮਨ ਬੋਲਣ ਕਾ ਚਪਕਾ ਕੀ ਗਿਆਨ ਹੋ ਗਿਆ ਸਤੋਕ ਹੈ ਵੀ ਹੋ ਗਿਆ ਐਸਾ ਸਤਗੁਰੂ ਦੇ ਲੋਕ ਹਾਂ ਐਸਾ ਨਾਮ ਦਿੜ ਕੋ ਦਿੜ ਰੜਾਇਓ ਲਫ਼ਜ਼ ਆਇਆ ਹਾਂਜੀ ਕਿਨੋਂ ਪੰਜਵੇਂ ਪਾਸ਼ਾ ਨੂੰ ਹੂੰ ਇਹਨੇ ਚੌਥੇ ਪਾਸ਼ਾ ਦੇ ਹੂੰ ਆਯੋਜਾ ਲਫ਼ਜ਼ ਆ ਗਿਆ ਜਿਹੜਾ ਉਹ ਕਹਿੰਦੇ ਸਿੱਧਾ ਭਗਤ ਉਤਰਿਆ ਆ ਜਨੂਤ ਹੈ ਤਾਂ ਅੱਜ ਆ ਗਿਆ ਲਫ਼ਜ਼ ਇਹਨਾਂ ਲੋਕਾਂ ਨੇ ਗੁਰਬਾਨੀ ਪੜ੍ਹੀ ਹੋਈ ਹੂੰ ਇੱਕ ਕਲਖਣ ਪੜ੍ਹ ਲਿਆ ਕਹਾਣੀ ਬੜੇ ਖਾਨਦਾਨ ਹੈ ਹੂੰ ਆਦ ਰਾਇਓ ਕਿਹਨੇ ਲੜਾਇਓ ਆਖੀ ਹੈ ਹੂੰ ਹਨ ਮਾਰ ਸੰਤੋਖ ਹੋਇਆ ਉਹਨਾਂ ਨੂੰ ਬੋਲ ਬੋਲ ਕੇ ਗੁਰੂ ਨਾਮ ਚੌਥੇ ਪਾਸ਼ਾ ਨੇ ਐਸਾ ਨਾਮ ਕਰਾਇਆ ਬੰਨ ਨੂੰ ਸੁਖਤੋਖ ਹੋ ਗਿਆ ਉਹ ਟਿਕ ਗਿਆ ਨਾਮ ਰੜ ਕਰਾਇਆ ਹਾਂ ਜੀ ਆਹ ਹੈ ਸੰਗਤ ਵਿੱਚ ਇਹ ਦਿਨ ਕਰਾਉਂਦੇ ਰਹੇ ਸਪੈਸ਼ਲ ਕੱਲੇ ਨੂੰ ਨਹੀਂ ਕਰਾਇਆ ਹੂੰ ਹੂੰ ਹੋ ਤਾਂ ਗਿਆ ਠੀਕ ਹੈ ਪਾਰ ਬ੍ਰਹਮ ਸਤਗੁਰ ਦਰਸਾਇਓ ਗੁਰ ਅਰਜਨ ਘਰ ਗੁਰੂ ਰਾਮਦਾਸ ਅਨਭਉ ਠਹਿਰਾਇਓ ਅਗਮ ਅਗੋਚਰ ਪਾਰ ਬ੍ਰਹਮ ਪਾਰਬ੍ਰਹਮ ਗ੍ਰਹਿ ਨੂੰ ਕੀ ਬੁੱਧੀ ਤੋਂ ਪਰੇ ਹੈ ਅਗੋਚਰ ਕਿਸੇ ਦੇ ਅਧੀਨ ਨਹੀਂ ਹੈ ਉਹ بے ਪਰਵਾਹ ਹੈ ਪਾਰਬ੍ਰਹਮ ਅਗਾਮਾ ਗੋਚਰੋ ਤੇ ਦੋ ਗੋਲ ਪਾਰਬ੍ਰਹਮ ਦੇ ਹੱਥ ਘੁਰ ਕਰ ਛਾਇਓ ਛੱਤ ਬੋਲਨੇ ਉਹਦਾ ਦਰਸ਼ਨ ਕਰਾਤਾ ਪਾਰਬ੍ਰਹਮ ਦਾ ਪਾਪਾ ਗੋਚਰ ਜਿਹਨੂੰ ਕਹਦੇ ਹੋ ਪਾਰਬ੍ਰਹਮ ਫੌਣ ਹੈ ਉਹ ਦਿਖਾ ਦਿੱਤਾ ਸਮਝਾਤਾ ਦਿਖਾਤਾ ਦਾ ਮਤਲਬ ਸਮਝ ਆਤਾ ਹੂੰ ਪਰ ਰਾਜੀ ਗੁਰ ਅਰਜਨ ਕਰਪੂਰ ਰਾਮਦਾਸ ਅਨਪਉ ਹੈ ਰਾਜੀ ਹਾਂਜੀ ਪਰ ਅਰਜਨ ਇੱਕ ਘਰ ਦੇ ਵਿੱਚ ਗੁਰ ਰਾਮਦਾਸ ਦੇ ਹੂੰ ਅਨਪਉ ਆਪ ਬਹੁਤ ਨਿਰਪਉ ਜਿਹੜਾ ਹੈ ਹੂੰ ਪਦਵੀ ਠਹਿਰਾਤੀ ਹੂੰ ਕਰਤਾ ਯਾਨੀ ਹੋਕ ਬੋਦੇ ਹਿਰਦੇ ਚ ਕੁਸ ਕਰਤਾ ਹਮਮ ਅਨਪੌਨੇ ਜਾਂਦਾ ਨੂੰ ਹਮਮ ਅਨਪੌਨੇ ਜਾਂਦਾ ਦੋ ਅਸੀਂ ਨੂੰ ਹਮਮ ਦੋ ਆਦੇ ਅਨਪੌ ਆ ਨਰਪੌ ਆ ਉਹੀ ਨੀ ਜਾਂ ਹਮਮ ਦੇ ਹਮਮ ਦੋ ਉਹ ਨਰ ਬੈ ਹੋਵੇ ਐ ਉਹ ਤੋਵੇ ਹੁਕਮ ਦੇ ਵਿੱਚ ਆ ਗਿਆ ਨਿਰਪੋਉ ਹੁੰਦਾ ਹੈ ਹਮ ਹੁਕਮ ਦੇ ਵਿੱਚ ਆ ਕੇ ਟਿਕ ਗਏ ਔਰ ਨਿਰਪੋਉ ਹੋ ਗਏ ਹਮ ਹੁ ਨਿਰਪੋਉ ਟਾ ਹੈ ਠੀਕ ਹੈ ਜੀ ਹਾਂ ਜੀ ਦੂ ਆਪਾਂ ਇਹ ਪੰਜ ਪ੍ਰਕਟ ਕਰਤਾ ਆਪਾਂ ਇਹ ਅਵਸਥਾ ਦੇ ਪਾਇਆ ਅੰਦਰ ਉਹਨਾਂ ਦੀ ਦੇਤਾ ਅਵਸਥਾ ਬਣਾਤੀ ਠੀਕ ਹੈ ਜੀ ਅਵਸਥਾ ਬਣਾ ਠੀਕ ਹੈ ਹਾਂਜੀ ਆ ਦੂਸਰਾ ਸਵਈਆ ਇੱਥੇ ਸਮਾਪਤ ਤੇ ਤੀਸਰਾ ਸ਼ੁਰੂ ਹੈ ਜੀ ਜਨਕ ਰਾਜ ਵਰਤਾਇਆ ਸਤਜੁਗ ਆਲੀਣਾ ਗੁਰ ਸ਼ਬਦੇ ਮਨ ਜਨਕ ਰਾਜ ਵਰਤਾਇਆ ਪਰ ਜਦਕਰ ਆਜ ਵਰਤ ਗਿਆ ਇਸਦੇ ਚ ਦੇ ਹੂੰ ਲੈਂਦਾ ਉਹ ਕੀ ਹੁੰਦਾ ਚਤਰਪਤੀ ਰਾਜਾ ਹੋ ਜਾਂਦਾ ਉਹ ਅਵਨਾਸ਼ੀ ਰਾਜ ਹੋ ਜਾਂਦਾ ਜਨਕ ਰਾਜ ਉਹ ਅਵਨਾਸ਼ੀ ਰਾਜ ਹੈ ਹੂੰ ਜਿਹਦਾ ਅਵਨਾਸ਼ੀ ਰਾਜ ਹੈ ਉਹੀ ਜਨਕ ਰਾਜ ਹੈ ਹੂੰ ਵਰਤ ਗਿਆ ਹਿਰਦੇ ਚ ਸਤਗੁਰ ਪ੍ਰਗਟ ਹੋ ਪ੍ਰਗਟ ਹਿਰਦੇ ਚ ਸਤਜਗ ਹੈ ਹਿਰਦੇ ਚ ਖਲਜੁਗ ਨਹੀਂ ਹੁੰਦਾ ਕਿਸੇ ਦੇ ਇਹ ਜੋਗ ਹਿਰਦੇ ਦੇ ਹੁੰਦੇ ਹੂ ਹੂੰ ਕੇਦੇ ਦੇ ਹਿਰਦੇ ਚ ਕਲ ਜੋਗਾ ਕਿਸੇ ਦੇ ਸਾਚੂਗਾ ਕਿਸੇ ਦੇ ਦੁਪਰ ਹੈ ਕਿਸੇ ਦੇ ਹੂੰ ਹੂੰ ਉਹਦੀ ਅਵਸਥਾ ਤੇ ਹੂੰ ਇਹ ਆਦਮੀ ਅਵਸਥਾ ਤੇ ਹੂੰ ਕੇ ਸਦੀ ਤੇ ਅਵਸਥਾ ਹੈ ਕਿ ਸਦੀ ਦੁਪਰ ਦੀ ਅਵਸਥਾ ਹੈ ਕਿ ਸਦੀ ਜਿਹੜੇ ਜੋਗੀ ਨੇ ਉਹ ਦੁਪਰ ਦੀ ਅਵਸਥਾ ਨੂੰ ਪੜਦੇ ਨੇ ਹੂੰ ਦੇ ਵਿੱਚ ਚਿਤ ਹੁੰਦਾ ਉੱਤੇ ਤਪ ਕਰਦਾ ਲਿਖਿਆ ਤਪੀ ਤਪੀ ਸਰ ਦੁਆਪਰ ਦੀ ਅਵਸਥਾ ਪੜਦੇ ਨੇ ਹੂੰ ਕਿੰਤਾਵਰੀ ਹੁੰਦੀ ਹੈ ਕਿ ਐਸ ਅਵਸਥਾ ਦੇ ਵਿੱਚ ਜਾ ਕੇ ਨਾਮ ਸੁਣਿਆ ਜਾਂਦਾ ਹੈ ਹੂੰ ਅਰ ਉੱਥੇ ਹੁੰਦਾ ਸ਼ਬਦ ਪਰ ਉੱਥੇ ਸ਼ਬਦ ਜਿਹੜਾ ਸੁਣਦਾ ਉਹ ਮਾਇਆ ਨਾਲ ਬਿੰਨਣ ਵਾਲਾ ਸ਼ਬਦ ਹੈ ਮਾਇਆ ਨਾਲ ਜੁੜਨ ਵਾਲਾ ਸ਼ਬਦ ਹੈ ਹੂੰ ਹੂੰ ਦੁਆਪਰ ਦੀ ਅਵਸਥਾ ਉਹ ਇਹ ਜਿਹਾ ਕੇ ਮਾਇਆ ਰੋਂ ਛੁੱਟਣ ਦਾ ਸ਼ਬਦ ਹੁੰਦਾ ਠੀਕ ਹੈ ਜਿਹੜਾ ਉਪਦੇਸ਼ ਦਿੱਤਾ ਸੀ ਨਾ ਉਹ ਰਿਵੀ ਬਹਰੂ ਉਹ ਪਹਿਲਾਂ ਮਾਇਆ ਦੇ ਵਿੱਚ ਜਿਵੇਂ ਵੱਡਾ ਉਪਦੇਸ਼ ਦਿੱਤਾ ਸੀ ਹੂੰ ਹੂੰ ਕਿਆ ਤੇ ਕਹਿੰਦੇ ਉਹ ਸੌਂਗੀ ਕਾ ਸੌਂਗੀ ਆ ਜਨਮ ਹੋ ਗਿਆ ਉਹਦਾ ਇਹ ਜਨ ਇਹ ਗਰਭ ਦੇ ਵਿੱਚ ਇੱਕੋ ਹੀ ਉਪਦੇਸ਼ ਥੋੜਾ ਜਾਂਦਾ ਹੂੰ ਹੂੰ ਕਿਰੇ ਚੱਕਰ ਵੀ ਉਹ ਕੇ ਉਹਦੇ ਉਹਨਾਂ ਨੂੰ ਗੁਰਬਾਣੀ ਦੇ ਸੁਦੇ ਸੋਜੂ ਨਹੀਂ ਛੱਡ ਕੇ ਤਰਪੂੜੀ ਛੱਡ ਕੇ ਤਸੂਦਾਰ ਚੋਂ ਦਾ ਇਹ ਵਿਧੀ ਹੈ ਗੁਰਬਾਣੀ ਹਾਂ ਇੱਥੇ ਆ ਕੇ ਮੁਕੜੀਆਂ ਹਾਂ ਗੱਲ ਕਹਿ ਰਹੇ ਉੱਥੇ ਮਹਾ ਭਾਰਤ ਉਹ ਕੁਝ ਹੋਰ ਸਮਝ ਰਹੇ ਨੇ ਕੱਲ ਇਹ ਕਹੀ ਦੀ ਹੱਥ ਕੁਝ ਹੋਰ ਲਾ ਲੇ ਹੁਣ ਇਹ ਤਾਂ ਹਰਥ ਲਾਉਣ ਵਾਲਿਆਂ ਨੂੰ ਹੱਥ ਲਾ ਕੇ ਦੱਸਣ ਤੇ ਕੁਝ ਤੇ ਗੱਲ ਪਈ ਆ ਹੈ ਨਹੀਂ ਨਹੀਂ ਇਹਨਾਂ ਹੀ ਨਾਲ ਗੱਲ ਹੁੰਦੀ ਹੈ ਦੱਸੀ ਜਾਂਦੀ ਬੜੇ ਉਹ ਮੈਂ ਕਹਉਂ ਭਾਈ ਬਰਮ ਗਿਆ ਦੇ ਸੀ ਪਰ ਤੁਸੀਂ বুঝੇ ਨਹੀਂ ਕੱਲ বুঝਾ ਆ ਦੱਸੀ ਕਹਿੰਦੇ ਭਈ ਹਾਂ ਸਾਡੂ ਹੁਣ ਪਤਾ ਲੱਗਦਾ ਭਈ ਉਹ ਧਾਰਮਿਕ ਗ੍ਰੰਥ ਕਿਉਂ ਮਿਲ ਗਏ ਦੇ ਜੋ ਬਹਿਰ ਕਹਾਣੀਆਂ ਹੀ ਨੇ ਪਹਾੜੂ ਕੀ ਫਿਰ ਉਹ ਤਾਂ ਗੁਰਧਰਥ ਵੀ ਕਹਿ ਜਾ ਸਕਦੇ ਹੂੰ ਹੂੰ ਪਰ ਸਾਰੇ ਜਨ ਦੇ ਵਾਸਤੂ ਕਹਾਣੀਆਂ ਕਰਕੇ ਹੂੰ ਰਾਜ ਵਰਤਾਇਆ ਸਤਜੁਗਾ ਲੀਣਾ ਗੁਰ ਸ਼ਬਦੇ ਮਨ ਮੰਨਿਆ ਅਪਤੀਜ ਪਤੀਣਾ ਉਹ ਗੁਰੂ ਕਿਉਂ ਖੋਦ ਨੇ ਹੂੰ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੂੰ ਹੂੰ ਉਹੀ ਵਕਤ ਠੱਡ ਗਾਇ ਰਿਹਾ ਹੂੰ ਹੂੰ ਉਹ ਆਪਣੀ ਗੱਲ ਦੱਸ ਨਹੀਂ ਰਿਹਾ ਹੂੰ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੂੰ ਹੂੰ ਦੇ ਹਿਰਦੇ ਚ ਕਲਯੁਗ ਹੋ ਜਾਂਦਾ ਹੈ ਇਹ ਗੱਲ ਸੱਚੀ ਲਿਖੀ ਆ ਉਹਨਾਂ ਨੇ ਘੜੀ ਨਾ ਮਿਲਤੇ ਤਾਂ ਕਲਯੁਗ ਕਲਪਨਾ ਚੱਲਦੀ ਹੈ ਉਹ ਕਹਿੰਦੇ ਨੇ ਆਪ ਠੀਕ ਹੈ ਜੀ ਇਸ ਗੱਲ ਦੇ ਇਸ ਗੱਲ ਦੇ ਜਵਾਬ ਦਰਸ਼ਨ ਸਿੰਘ ਹੀ ਕਹੂਗਾ ਹੂੰ ਹੂੰ ਦਰਸ਼ਨ ਸਿੰਘ ਹੀ ਤਾਂ ਆਪ ਲਿਖਦੇ ਨੇ ਗੱਲ ਹੂੰ ਮਾਰਦੇ ਨੇ ਇੱਕ ਦਾ ਪਤਾ ਨਹੀਂ ਇਹਨਾਂ ਨੂੰ ਹੂੰ ਹੂੰ ਬੋਲੇ ਬੈਠੇ ਨੇ ਸਾਰੇ ਪੜਦੇ ਜਾਂ ਖੋਲੀ ਆਣਗੇ ਪਤਾ ਲੱਗ ਜੂਗਾ ਪੱਲੇ ਕੀ ਹੈ ਹੋ ਜੀ ਹਾਂ ਜੀ ਗੁਰ ਸ਼ਬਦੇ ਮਨ ਮੰਨਨੇ ਜੋ ਗੁਰਦੇ ਸ਼ਬਦ ਕਹੇ ਵਜਨ ਕਹੇ ਜਿ ਗੁਰ ਰਬ ਦੇਸ ਦੀ ਗਿਆ ਭਰੋਸਾ ਕਰਦਾ ਕਿਸੇ ਤੇ ਵੀ ਹੂੰ ਆ ਜੀਕੇ ਉਹ ਉੱਠਾ ਕਰ ਗਿਆ ਖੜ ਗਿਆ ਪੈਰ ਢੱਡ ਕੇ ਠੀਕ ਹੋ ਜੀ ਹੂੰ ਗੁਰੂ ਨਾਨਕ ਸੱਚ ਸਾਜ ਸਤਿਗੁਰ ਸੰਗ ਲੀਣਾ ਉਹ ਲਾਖਣਾ ਸੱਚ ਦੀ ਤੂ ਸਾਜੀ ਹੂੰ ਹਾਂ ਅਤਤਵਰਦੀ ਸੰਗਤ ਕਰ ਲਈ ਹੂੰ ਹੂੰ ਨਾਨਕ ਨੇ ਅਤਿ ਵੀ ਨੇ ਸਾਚ ਕੇ ਸੱਚ ਤੇ ਚੱਲ ਕੇ ਹੂੰ ਦੀ ਹੋਤੀ ਹੂੰ ਹੂੰ ਨਾਲ ਲੀਨ ਹੋ ਗਿਆ ਸੱਚ ਦੇ ਗਿਆਨ ਤੇ ਲੀਨ ਹੋ ਗਿਆ ਕਹਿੰਦੇ ਸਤਪੁਰ ਨੇ ਜਿਹੜਾ ਕੱਦ ਨਹੀਂ ਉੱਤੇ ਸਾਰਾ ਰੱਖਿਆ ਹੋਇਆ ਹੈ ਖੜਾ ਮਹਿਲ ਹੂੰ ਜਾਣ ਕਰਾਜ ਚਲਾਇਆ ਸੱਚ ਕੋਟਸਤਾੜੀ ਦੀਪ ਤੇ ਹੂੰ ਇਹ ਉੱਤੇ ਕੀ ਆ ਠੀਕ ਹੈ ਜੀ ਆਨ ਕਰਾਜ ਚਲਾਇਆ ਦੀ ਰੱਖੀ ਆ ਉੱਥੇ ਠੀਕ ਤੇ ਕਾ ਅਸੀਂ ਸੱਚ ਛੱਡ ਕੇ ਝੂਠ ਲਿਆ ਹੋਇਆ ਸਾਰਾ ਹੀ ਪ੍ਰਚਾਰ ਹੈ ਸਾਰਾ ਹੀ ਝੂਠ ਹੈ ਸਾਡਾ ਠੀਕ ਹੈ ਜੀ ਹੌਣ ਦੇ ਸਤ ਗੁਰੂ ਅਰਜਨ ਕਰ ਗੁਰੂ ਰਾਮਦਾਸ ਅਪਰੰਪਰ ਬੀਨਾ ਬਰ ਅਰਜਨ ਕਰ ਗੁਰ ਰਾਮਦਾਸ ਹੂੰ ਅਪਰੰਪਰ ਗੁਰੂ ਅਰਜਨ ਦੇ ਘਰ ਉਹੀ ਬੂਨਾ ਪੈਦੀ ਹੈ ਜਿਹੜੀ ਗੁਰੂ ਰਾਮਦਾਸ ਦੇ ਘਰ ਸੀ ਉੱਦਰ ਸੀ ਗੁਰ ਰਾਮਦਾਸ ਦੇ ਹਿਰਦੇ ਵਿੱਚ ਅਪਰੰਪਰ ਬੀਨਾ ਉਹ ਸ਼ਬਦ ਗੁਰੂ ਪ੍ਰਗਟ ਹੋ ਗਿਆ ਜਿਹੜਾ ਗੁਰੂ ਰਾਮਦਾਸ ਦੇ ਸੀ ਹੂੰ ਹੂੰ ਅਬ ਤੇਜ ਬਤੇਣਾ ਹੋ ਗਿਆ ਨਾ ਮਨ ਠੀਕ ਹੈ ਜੀ ਜੋ ਗੁਰਬਾਣੀ ਉਚਰਦੇ ਸੀ ਗੁਰੂ ਰਾਮਦਾਸ وہی ਉਚਰ ਰਹੇ ਨੇ ਵਰਜਨ ਠੀਕ ਹੈ ਜੀ ਕਿਰਨਾਂ ਬੁਲਾ ਰਹੀ ਸੀ ਜਿਹੜੀ ਤੁਰਕੀ ਬਾਣੀ ਉਹਨੂੰ ਉਤਰਦੀ ਸੀ ਹੋਈ ਉਹ ਰੂਹ ਉਤਰ ਲਗੀ ਹੂੰ ਗੱਲ ਕਹਿ ਰਹੇ ਠੀਕ ਹੈ ਜੀ ਇਹਦਾ ਕਬੂਤ ਵੀ ਐ ਪਰਬਾਹ ਹੋਈ ਐ ਉਹ ਵੀ ਬੁਲਾਇਆ ਬੋਲਦਾ ਸੀ ਉਹ ਵੀ ਬੁਲਾਇਆ ਬੋਲਦਾ ਸੀ ਹੂੰ ਇਹ ਰਾਹ ਪੈਣਾ ਇਹਨੂੰ ਰਾਹ ਪੈਣ ਕਿਹਾ ਹੂੰ ਆ ਤਨ ਤਨ ਲਾਉ ਬੇਲਡ ਵਾਜਾ ਕੋਈ ਗਏ ਜੀ ਫੇਰ ਬਾਦਰ ਮਾਦਰ ਬਚਨ ਨਿਕਲਦੇ ਨੇ ਹੂੰ ਹੂੰ ਕੀ ਆ ਠੀਕ ਆਈਆ ਦਾ ਇਹ ਜਿਹੜੀ RAMDAS ਦੇ ਘਰ ਬੀਨਾ ਵੱਜਦੀ ਸੀ ਉਹੀ ਅਰਜਲ ਤੇ ਬਜਲਦੀ ਤਾਂ ਗੁਰਿਆਈ ਵੜੀ ਆ ਹੂੰ ਨਵੇਂ ਨਹੀਂ ਮਿਲ ਬਚਨ ਬੰਦੇ ਤੇ ਦੂਏ ਬੰਦੇ ਦੀ ਸੀ ਬੁੱਢ ਜਵਾਬ ਦੇ ਪ੍ਰਚਾਰ ਕਰਦਾ ਆ ਬ੍ਰਹਮਪੁਰ ਕਿਨਾ ਗਈ ਕਿਆ ਸਤ ਹੋ ਰਹੇ ਸੀਗਾ ਹੂੰ ਇਹ ਜਿਹੜਾ ਕਾ ਕਰ ਗਿਆ ਕੌਲ ਲੈਣੇ ਲਈ ਚੱਕ ਲਿਆ ਉਹਨਾਂ ਨੇ ਚੱਕਿਆ ਜੀ ਕਿੰਨੀਆਂ ਘਟੀਆਂ ਨੇ ਘਟੀਆਂ ਟੈਸਟ ਠੀਕ ਹੈ ਹਾਂਜੀ ਤੀਸਰਾ ਸੋ ਗਿਆ ਸਮਾਪਤੀ ਹੁਣ ਚੌਥਾ ਸ਼ੁਰੂ ਜੀ ਖੇਲ ਗੂੜੋ ਕੀਓ ਹਰ ਰਾਇ ਸੰਤੋਖ ਸਮਾਚਰੋ ਬਿਮਲ ਬੁੱਧ ਸਤਗੁਰ ਸਮਾਣੀਓ ਖੇਲ ਗੂੜੋ ਕਿਓ ਕਹਿੰਦੇ ਗੂੜਾ ਹੋ ਗਿਆ ਹੁਣ ਗੱਲਾਂ ਗਹਿਰੀਆਂ ਚਲੀਆਂ ਗਈਆਂ ਗੱਲ ਗਹਿਰਾਈ ਚ ਚਲੀ ਗਈ ਅੱਗੇ ਹਰ ਰਾਏ ਪਰ ਗੂੜਾ ਕਰਤਾ ਹੂੰ ਸੁਤੋਖ ਸਮਾਚਰਿਓ ਸੁਤੋਖ ਦੀ ਹਲਦ ਵਾਲੇ ਸੁਤੋਖ ਦੀ ਕਨਾਤ ਲਾਤੀ ਸੁਤੋਖ ਦਾ ਪਰਦਾ ਲਾਤਾ ਚਾਲ شپیرے ਹੂੰ ਸਤੋਗਦੇ ਦਾਰੇ ਚ ਬੈਠ ਕੇ ਟਿੱਕੇ ਹੂੰ ਰੇਮਨ ਬੁੱਧ ਸਤਗੁਰੂ ਤੋਂ ਮਾਣਿਉ ਹਾਂਜੀ ਰੇਮਨ ਬੁੱਧ ਦਾ ਸਤਗੁਰੂ ਰੇਮਨ ਬੁੱਧ ਨੇ ਸਤਗੁਰੂ ਦੇ ਵਿੱਚ ਪ੍ਰਵੇਸ਼ ਕਰ ਲਿਆ ਬਵੇਂ ਬੁੱਧੀ ਪ੍ਰਗਟ ਹੋ ਗਈ ਸਤਗੁਰੂ ਦੇ ਵਿੱਚ ਹੂੰ ਹੂੰ ਅਗਲੇ ਦੀ ਖਾਸ ਲਾ ਕੇ ਵਿਚਾਲੇ ਬੈ ਸਵੇਖ ਬੁੱਧ ਆ ਬੈਠੀ ਆ ਕੇ ਹਮਮ। ਅਬ ਐਕਮਤ ਪ੍ਰਗਟ ਹੋ ਗਈ। ਚੰਡੀ ਪ੍ਰਚੰਡ ਰੂਪ ਵਿਚ ਆ ਕੇ ਬੈਠ ਗਈ। ਹਮਮ। ਰੂਪ ਵਿਚ ਪ੍ਰਗਟ ਹੋ ਗਏ ਆਪ। ਦੀ ਵਿਵਸਥਾ ਹੋ ਗਈ। ਪਰ ਸਤੋਖ ਵੀ ਇਹ ਨਾਲ ਠੀਕ ਹੈ ਜੀ। ਆ ਜਉਨੀ ਸੰਭਵਿਓ ਸੁਜਸ ਕਲ ਕਵਿਯਣ ਬਖਾਣੀਓ। ਅਜੋ ਨਹੀਂ ਸੰਭ ਹੋਇਆ ਇੱਕ ਦੇ ਵਿੱਚ ਆਪ ਰੁਕਾ ਤੇ ਐਸਾ ਹੋ ਜਾਣਾ ਹੂੰ ਉਹ ਬੇ ਇੱਕ ਬੁੱਧੀ ਹੋਵੇ ਪਰਮੇਸ਼ਰ ਦੀ ਆਦਮੀ ਦਾ ਹੋਵੇ ਸਰੀਰ ਉਹ ਜਿਹਦੇ ਚ ਆ ਕੇ ਬਹਿ ਜਾਵੇ ਐਸਾ ਸੰਭ ਕਰਕੇ ਦਿਖਾਤਾ ਅਰਜੁਨ ਨੂੰ ਨੇ ਐਸਾ ਸਭ ਹੋ ਗਿਆ ਜਿਹਦੇ ਹੰਦੇ ਚ ਵੀ ਜਿਹੜਾ ਪਿੱਛੇ ਹੁੰਦਾ ਆ ਉਹ ਫੇਰ ਹੋ ਗਿਆ ਠੀਕ ਹੈ ਜੀ। ਜ਼ਬਰਦਸਤ ਦੇ ਵੀ ਸੰਭਵ ਹੋਇਆ ਸੀ। ਇਹ ਕਿੱਥੇ ਵੀ ਹੋ ਗਿਆ। ਇੱਥੇ ਹੀ ਹੋਇਆ ਨੇ। ਠੀਕ ਹੈ ਜੀ। ਹਾਂ ਇੱਕੋ ਵਾਰ ਨਹੀਂ ਸੰਭਵ ਹੋਇਆ, ਸੰਭਵ ਹੋ ਰਿਹਾ ਕਹਿੰਦੇ ਇੰਪੋਸੀਬਲ ਆ, ਪੋਸੀਬਲ ਹੋ ਰਹੀ ਹੈ ਗੱਲ। ਇਹ ਗੱਲ ਇੰਪੋਸੀਬਲ ਕਹਿ ਰਹੇ ਨੇ ਸਾਰੇ ਵਿਦਵਾਨ ਵੀ ਅੱਜ ਮੰਨ ਰਹੇ ਨੇ। ਪਹਿਲਾਂ ਵਿਦਵਾਨ ਪਰਨਤ ਵੀ ਇਹੀ ਕਹਦੇ ਸੀ। ਜਿੰਨਾ ਜਰਾ ਆਦਮੀ ਹੁੰਦਾ ਉਹਦੀਆਂ ਇੱਛਾਵਾਂ ਖਾਸ਼ਾਂ ਪੂਰੀ ਨਹੀਂ ਸਕਦੀਆਂ ਹੂੰ ਹੂੰ ਤਾਂ ਤੋਂ ਸਮਾਜ ਤੇਰੇ ਦੇ ਵਿੱਚ ਇੱਛਾ ਕੋਈ ਹੈ ਹੀ ਨਹੀਂ ਨਾਨਕ ਗੁਰੂ ਨਾਨਕ ਅੰਗਦ ਵਰਿਓ ਅਮਰ ਨਿਧਾਨ ਗੁਰ ਨਾਨਕ ਨੇ ਅੰਗਦ ਨੂੰ ਉਪਦੇਸ਼ ਦਿੱਤਾ ਵਰਿਓ ਦਾ ਮਤਲਬ ਹੈ ਉਹ ਬਤੇ ਜਿਆਗੋ ਨਾਮ ਕਦੇ ਹੂੰ ਨੂੰ ਥਾਲਾ ਖਜ਼ਾਨਾ ਦੇਤਾ ਉਹ ਜਿਹੜਾ ਗਿਆਂਦਾ ਸੀ ਹੂੰ ਜੇ ਤਾਂ ਹਨ ਪੂਰਾ ਖਜ਼ਾਨਾ ਗਿਆਂਦਾ ਗਾਂ ਦੇਖੋ ਅੱਗੇ ਬਦਲ ਜਾਣੀ ਹੁਣ ਇੱਥੋਂ ਲਾਈਨ ਬਦਲ ਹੈ ਹੂੰ ਹਾਂ ਇੱਥੋਂ ਗਈ ਹੈ ਦੂਰ ਲੋੜ ਨਹੀਂ ਗਈ ਅਧਿਕਾਰੀ ਬੈਠਾ ਹੈ ਹੂੰ ਕਿਹ ਅਧਿਕਾਰੀ ਹੈ ਉਹ ਜਿਹੜੇ ਕੋ ਜਾਣਦਾ ਹੈ ਰਾਜੇ ਨੂੰ ਰਾਜ ਦਿੱਤਾ ਹੈ ਹੂੰ ਉਹ ਦਸਵੰਨ ਜੇਹੀ ਗੱਲ ਹੈ ਆ ਅਨੁਕਤਾ ਹੈ ਤੇ ਪਿਆ ਜਿਹੜਾ 75 ਨਾਲ ਅਨੁਕਤਾ ਹੂੰ ਤੇ ਦਵਾਰ ਆਉਂਦਾ ਚਾਰ ਵਾਰ ਸਵੇਰਾਂ ਜੇ ਅੱਗੇ ਪੜੋ ਗੁਰੂ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪ੍ਰਮਾਨ ਹੋਰ ਰਾਮਦਾਸ ਅਰਜਨ ਵਰਿਓ ਰਾਮਦਾਸ ਨੂੰ ਕਿਹਨੇ ਵਰਿਆ ਇਹ ਦੱਸੋ ਹੂੰ ਹੂੰ ਕੌਣ ਛੜਤਾ ਹੂੰ ਹੂੰ ਆਹ ਕੋਈ ਰਾਜਾ ਇਹ ਉਸ ਅਵਸਥਾ 'ਚ ਥੋੜਾ ਜਿਹਾ ਫਰਕ ਸੀ ਥੋੜਾ ਜਿਹਾ ਫਰਕ ਸੀ ਬਾਹਰ ਦੇ ਬਾਹਰ ਸੁਣਨੇ ਵਰਿਆ ਨਹੀਂ ਐ ਨਾ ਮਤੇ ਵਿੱਚ ਸੁਣ ਲਿਆ ਹੂੰ ਉਹ ਰਮਦਾਸ ਕਹਿੰਨੇ ਖਿੜਕੀ ਤੇ ਆ ਕੇ ਉਹ ਕਹਿੰਨੇ ਮੁੰਡਾ ਇਹੋ ਜਿਹਾ ਚਾਹੀਦਾ ਤੇ ਇਹੋ ਜਿਹਾ ਤਾਂ ਫਿਰ ਇਹੀ ਕੀਤਾ ਹੀ ਨਹੀਂ ਤਾਂ ਸਰਦਿਆ ਹੀ ਨਹੀਂ ਗੱਲ ਤਾਂ ਕੀਤੀ ਹੋਰੀ ਹੂੰ ਅਖੜਾਈ ਦੇਖ ਲਿਆ ਇਹੋ ਜਿਹਾ ਤੋਂ ਹੀ ਦੇਖਣ ਤੋਂ ਤੇ ਹਰੇਕ ਨੂੰ ਪਤਾ ਲੱਗ ਜਾਂਦਾ ਜਿਹੜੇ ਇੰਟਰਵਿਊ ਲੈਂਦੇ ਨੇ ਨਾ ਜਿਹੜਾ ਆ ਕੇ ਖੜਦਾ ਮੁੰਡਾ ਉਹ ਦੇਖ ਲੈਂਦੇ ਨੇ ਹੂੰ ਖੜਨ ਦਾ ਤਰੀਕਾ ਤੋਂ ਹੁੰਦਾ ਤਰੀਕਾ ਬੋਲਣ ਤੋਂ ਬਿਨਾਂ ਕਾਬਲੀਅਤ ਦਾ ਤਾਂ ਦਾ ਸਭ ਨੂੰ ਪਤਾ ਲੱਗ ਜਾਂਦਾ ਪਰ ਬੋਲਣ ਤੋਂ ਬਿਨਾਂ ਵੀ ਪਤਾ ਲੱਗ ਜਾਂਦਾ ਬੈਠਣ ਤੋਂ ਦੇਖਣ ਤੋਂ ਫੇਸ ਰੀਡਿੰਗ ਤੋਂ ਕੁਝ ਬਤਾਲਾ ਨਹੀਂ ਜੀ ਠੀਕ ਹੈ ਜੀ ਨੇ ਕੀ ਦੇਖਣਾ ਠੀਕ ਹੈ ਜੀ ਹਾਂ ਜੀ ਅਰਜਨੋਂ ਨਹੀਂ ਤੇ ਨਾ ਆਰਾਮਦਾਸੋਂ ਨਹੀਂ ਹੁੰਦੇ ਇਹ ਤੱਕ ਸਿਰਾਂ ਤੋਂ ਉਹਨੇ ਰਾਜ ਲੈਣਾ ਸੀ ਉਹਨੇ ਫੇਨਾ ਸੀ ਉਹ ਪੂਰਾ ਰਾਜ ਲੈਣਾ ਸੀ ਉਹ ਜੇਣਾ ਸੀ ਹੂੰ ਹੂੰ ਅਰਜਨ ਉਹ ਭਰਿਓ ਲਿਖਿਆ ਹੂੰ ਹੂੰ ਅਰਜਨ ਨੇ ਘਰ ਬੈਠ ਕੇ ਉਹਦੇ ਸੁਣਨਾ ਘਰ ਉਹ ਉਹ ਕਰ ਨਹੀਂ ਆ ਹੂੰ ਉਹਦਾ ਮਾਰਗਨ ਚੋ ਗੱਲ ਸੁਣ ਲਈ ਬਸ ਹੂੰ ਹੂੰ ਸੰਗਤ ਵਿੱਚ ਮਰੀ ਭੈਣਾਂ ਸੀ ਕੋ ਗੜੀਓ ਵੇਚਦਾ ਹੁੰਦਾ ਸੀ ਹੂੰ ਹੂੰ ਗੱਲ ਮਤਲਬ ਹੈ ਪਹਿਲਾਂ ਸੁਣੀ ਹੋਈ ਗੱਲ ਜੋ ਚਲਦੀ ਸੀ ਲੋਕਾਂ ਵਿੱਚ ਗੱਲ ਕਿ ਉਹਦੀ ਘਰ ਨਾਨੀ ਗੱਲ ਕਰਦੀ ਸੀ ਉਹਨਾਂ ਤੋਂ ਹੀ ਸੁਣ ਕੇ ਬਸ ਅਡੋਲ ਅਵਸਥਾ ਹੋ ਗਈ ਸੀ ਉਹਦੀ ਹਾਂ ਹਾਂ ਅਹ ਦੇ ਕਾਬਲ ਉਹਦੋ ਹੀ ਹੋ ਗਿਆ ਸੀ ਉਹ ਪਾਰਸ ਪਰਸ ਪਰਸ ਪਰ ਮਾਨਵਤਾ ਸਰਪੇਏ ਸੀ ਜਿਵੇਂ ਗੁਰੂ ਅਰਜਨ ਦੇਵ ਦਾ ਪਾਰਸ ਪਰਸ ਲਿਆ ਹੂੰ ਹੂੰ ਆ ਪਰਮਾਨ ਹੋ ਗਿਆ ਠੀਕ ਹੈ ਆ ਸ਼ੁਰੂ ਪਰਸ ਨਾਲ ਸੋਣਾ ਹੋਏ ਜਾਣਾ ਉਹਦਾ ਹੂੰ ਹੂੰ ਸਮਝ ਸੀ ਵੀ ਸਤਗੁਰ ਨੇ ਆਪਣੇ ਵਰਗਾ ਹੀ ਕਰਤਾ ਉਹ ਠੀਕ ਹੈ ਹੋ ਗਿਆ ਪਰਸ ਕਰਕੇ ਹਾਂ ਜੀ ਜੀ ਜੀ ਇੱਥੇ ਚੌਥਾ ਸੋਇਆ ਸਮਾਪਤ ਹੋ ਗਿਆ ਜੀ ਸ਼ੁਰੂ ਹੈ ਜੀ ਸਤਿ ਜੀਵਨ ਅਰਜਣ ਅਮੋਲ ਆਜੋਨੀ ਸੰਭੋ ਸਤਿ ਜੀਵਨ ਦਾ ਸਤਿ ਜੀਵਨ ਸਤਿ ਜੀਵਨ ਹੋ ਗਿਆ ਅਮੋਲ ਅਜੋਨੀ ਆ ਦੇਖੋ ਜੋਨੀ ਹੋ ਗਿਆ ਨਾ ਹਾਂ ਜੀ ਅਜੋਨੀ ਹੋਣਾ ਹੈ ਸਿ ਹੂੰ ਹੂੰ ਜੀਵਨ ਸਤਿ ਜੀਵਨ ਕੌਣ ਕਾਲ ਮੂਰਤ ਹੂੰ ਆ ਜੀਵਨਾ ਕਾਲ ਮੂਰਤ ਨਹੀਂ ਆਉਂਦੀ ਜੀ ਜੀ ਆ ਜਾਓ ਜੀ ਹੂੰ ਆਪਾਂ ਹੋ ਗਿਆ ਹੁਣ ਆਪਣੇ ਆਪ ਤੋਂ ਹੀ ਆ ਪੈਦਾ ਹੋਇਆ ਹੋਇਆ ਹੈ ਇਹ ਆਪਸ ਤੇ ਪਾਈਆ ਹੈ ਇਹ ਕਦੇ ਹੀ ਦਾਤ ਆਪਸ ਵਿੱਚ ਜੋ ਪਾਈ ਆ ਹਾਂ ਨਾ ਸ਼ਾਗਰਮਤ ਸਾਹਿਬ ਟੁੱਟੇ ਜੇ ਮਲੇ ਹਾਂ ਨਾ ਨਾ ਪਾ ਲੈ ਜੁਰੀ ਹੋ ਗਿਆ ਠੀਕ ਹੈ ਅਕਾਲ ਮੂਰਤ ਵੀ ਹੋ ਗਿਆ ਠੀਕ ਹੈ ਜੀ ਹਾਂ ਹਾਂ ਜੀ ਪਰ ਦੁਖ ਨਿਵਾਰ ਅਪਾਰ ਅਨੰਮ ਆ ਪੈ ਪਜਨ ਪੈਦਾ ਨਹੀਂ ਸੀ ਨਾ ਤਰ ਹਾਂਜੀ ਮੇਰ ਬਾਹਰ ਨਹੀਂ ਸੀ ਮੇਰ ਬਾਹਰ ਨਿਰਵੈਰਤਾ ਹੋ ਗਿਆ ਵੀ ਹੋ ਗਿਆ ਪੈ ਦੂਰ ਹੋ ਪੈ ਪਜਨ ਪੈ ਵੀ ਪਰ ਪੈ ਦੂਰ ਹੋ ਗਈ ਪਰ ਪੈ ਪਜਨ ਤਾਰੂ ਪਜੜ ਵਾਲਾ ਪਨ ਦੁੱਖਣ ਵਾਲ ਉਹ ਅਨੁਪਉ ਦੇ ਜਾ ਉਨਕੋ ਦੇ ਜਾ ਨਾਮ ਹੂੰ ਉਹ ਪ੍ਰਗਟ ਹੋ ਗਿਆ ਇਹ ਦੇ ਕਿ ਜਿਹੜਾ ਦੁੱਖ ਨਹੀਂ ਰਹਿਣ ਗਿਆ ਹੂੰ ਹੂੰ ਗਿਆ ਹੂੰ ਦਹਿਨ ਸੀਤਲ ਸੁਖ ਅਗਾ ਹੂੰ ਇਹ ਗਾਣ ਹੂੰ ਅਗਾ ਇਹ ਮਨ ਨਹੀਂ ਭੜਿਆ ਜਾਂਦਾ ਕਿਸੇ ਤੋਂ ਹੂੰ ਅਗਾ ਗਾਣ ਅਗਾ ਚੀਜ਼ ਨੂੰ ਗਾਣ ਕਰ ਲਿਆ ਫੜ ਲਿਆ ਬੋਲੀ ਪਕੜ ਚਾਹੁੰਦਾ ਪਕੜ ਕਰ ਲਿਆ ਮਨ ਕਾਬੂ ਕਰ ਜਿਹੜਾ ਮਨ ਕਾਬੂ ਨਹੀਂ ਕੀਤਾ ਜਾ ਸਕਦਾ ਉਹ ਕਾਬੂ ਕਰ ਲਿਆ ਨੂੰ ਦੇਣ ਨਿਸ਼ਚਿਤ ਕਰਤਾ ਨਿਸ਼ਚਿਤ ਕਰਨ ਵਾਲਾ ਚੀਤਲ ਸੁਖ ਦਾਤਾ ਤੋਂ ਚੀਤਲ ਸੁਖਾਦਾਤਾ ਹੂੰ ਹੂੰ ਬੰਨੂ ਬਸ ਕਰਨ ਵਾਲਾ ਰੰਮ ਪ੍ਰਾਂਤੀ ਦਾ ਰਚ ਕਰਨ ਵਾਲਾ ਚੀਤਲ ਦਾ ਦਾਤਾ ਹੈ ਉਦਬਿਓ ਹੂੰ ਉਹ ਪੈਦਾ ਹੋ ਗਿਆ ਉਦਬਿਓ ਹੂੰ ਕਿ ਆਇਆ ਹਾਂਜੀ ਹੂੰ ਅਤਤ ਉਹ ਉਦਬਿਓ ਪੂਰਕ ਵਿਧਾਤੋ ਨਾ ਪੈਦਾ ਹੋ ਗਿਆ ਪੂਰਕ ਵਿਧਾਤਾ ਨਾ ਐਤ ਪਵਨ ਟੋਲ ਵਾਲਾ ਠੀਕ ਹੈ ਜੀ ਨਾਨਕ ਆਦ ਅੰਗਦ ਅਮਰ ਸਤਗੁਰ ਸ਼ਬਦ ਸਮਾਇਓ ਨਾਨਕ ਆਦ ਪੈ ਨਾਨਕ ਆਦੀ ਵਰਨਾ ਪਹਿਲਾ ਪਹਿਲਾ ਨਾਨਕ ਫਿਰ ਅਬਦ ਫਿਰ ਅਬਰ ਸਤਗੁਰ ਅਬਰ ਸਤਗੁਰ ਸ਼ਬਦ ਸਮਾਇਓ ਇਹ ਤਿੰਨੇ ਕਿਉਂ ਆਏ ਨੇ ਇਕੱਠੇ ਚੌਥੇ ਕਿਉਂ ਨਹੀਂ ਆਏ ਵਿੱਚ ਦੂਆ ਪੁਲਟ ਆ ਗਿਆ ਹੂੰ ਹੂੰ ਇੰਨਾ ਦੀਓ ਸਾਦਾਈ ਆ ਚੌਥੇ ਦੀ ਕਿਉਂ ਨਹੀਂ ਆਈ ਹੂੰ ਕੀ ਵੇਲੇ ਰਾਮਦਾਸ ਜੀ ਦਾ ਖੱਤਾ ਸਾਧ ਦੇ ਵਿੱਚ ਕਿੰਨੇ ਨੇ ਇਹ ਡੀਨਰ ਇਹਨਾਂ ਦੇ ਨੂੰ ਇੱਥੇ ਪਈ ਆ ਸਾਡੇ ਕੋਲ ਇਹ ਸਬੂਤ ਇਹਨੂੰ ਕੀ ਕਰ ਲਗੇ ਹੋ ਤੇ 75 ਨਾਲ ਗਏ ਆ ਉਹਨਾਂ ਕੋਲ ਸਰਵਕ ਚੋਪੋ ਹਰ ਤੋਂ ਸਭ ਕੁਝ ਦੀ ਹੋਂਦ ਹਮ ਐਦਾ ਕੀ ਲਾ ਕਿਉਂ ਆ ਇਹ ਸਮਝਾ ਦੇਣ ਕਿਉਂ ਗਏ ਕੀ ਗੱਲ ਹੈ ਕੀ ਭੇਜ ਆ ਇੱਥੇ ਚੌਥੇ ਪਾਸ਼ਾ ਹੈ ਨਹੀਂ ਉਸ ਵੇਲੇ ਜਦੋਂ ਤੇ ਸੁਬਈਆ ਲਿਖਿਆ ਜਾਂਦਾ ਚੌਥੇ ਪਾਸ਼ਾ ਕਿਉਂ ਵੀ ਜਦ ਲਿਖੀ ਗਈ ਆ ਤਨਾਂ ਦੀ ਕਿਉਂ ਘੱਟੀ ਆ ਚੌਥੇ ਦੀ ਵਿੱਚ ਕਿਉਂ ਦੀ ਨਾਦ ਵੀ ਉਸ ਵੇਲੇ ਲਿਖੀ ਗਈ ਆ ਪੰਜਵੇਂ ਪਾਸ਼ੇ ਹੋਏ ਹੂੰ ਅੱਡ ਕਿਉਂ ਕਰਤਾ ਉਹ ਅੱਡ ਕਿਉਂ ਹੈ ਹੂੰ ਅਸਲ ਜੈਥੇ ਤੱਕ ਨਾਨਕੇ ਨੇ ਦਿੱਤਾ ਰਾਹ ਛੋਡੀਆਂ ਨੂੰ ਹੂੰ ਨੇ ਦਿੱਤਾ ਸੀ ਰਾਹ ਪਹਿਲਾਂ ਨੂੰ ਹੂੰ ਹੂੰ ਉਹਨਾਂ ਨੇ ਸਾਰੀ ਦਿੱਤਾ ਉਹਦਾ ਸੰਸਾਰੀ ਹੋ ਰਾਜ ਸੀ ਹੂੰ ਹੂੰ ਉਹਨੇ ਨਰਾਗਾਰੀ ਦਿੱਤਾ ਹੂੰ ਹੂੰ ਇਹ ਅਵਨਾਸ਼ੀ ਦਿੱਤਾ ਰਾਜ ਹੂੰ ਰਾਜ ਦੀ ਅਸਲ ਦਿੱਤਾ ਰਾਜ ਦਾ ਜੇ ਕੋ ਹਾਂ ਮੈਂ ਤਾਂ ਆਪਨੇ ਕਰੂੰ ਨਾ ਰਾਮਨਾਥ ਹੂੰ ਜਦੋਂ ਦਿੱਤੀ ਉਹਨੇ ਜਦੋਂ ਜਮਵਾਰੀ ਹੋ ਦਿੱਤੀ ਰਾਜ ਉੱਥੇ ਮਿਲਿਆ ਸੀ ਉਹਨੂੰ ਵੀ ਉਹ ਬਰੁਗਾਦੀ ਰਹੇਗਾ ਉਪਦੇਸ਼ ਨਹੀਂ ਦਿੱਕਦਾ ਠੀਕ ਹੈ ਜੀ ਉਹਦਾ ਛਤਰਪਥ ਪਹਲਾ ਹੀ ਸੀਗਾ ਤਾਂ ਬੇਰ ਸੁਣ ਕੇ ਰਾਜ਼ ਦਿੱਤਾ ਉਹਨੇ ਹੂੰ ਕੋਈ ਚੱਲ ਪੂਰਾ ਤਾਂ ਨਹੀਂ ਸੀ ਭਗਤ ਉਹ ਪਰ ਪੰਡਤ ਤਾਂ ਜ਼ੀਰਦਵਾਨ ਤਾਂ ਸੀ ਹੂੰ ਉਹ ਕਦੀ ਜੀ ਰਾਜ਼ ਨਹੀਂ ਦਿੱਕੂਲ ਵੀ ਹੂੰ ਤਾਂ ਸੀ ਸੰਤੋਖ ਕੀ ਹੋਣਾ ਕੋਈ ਗੱਲ ਨਹੀਂ ਸਤਾਰ ਤੋਂ ਉੱਪਰ ਹੁਣ ਠੀਕ ਹੈ ਜੀ ਸੰਤੋਖ ਪਹਿਲਾਂ ਹੀ ਸੀ ਬੇਦਾਮ ਦਾ ਹਾਂ ਉਹ ਗਾਣ ਸੰਤੋਖ ਦਾ ਪਹਿਲਾਂ ਹੀ ਸੀ ਆ ਗੱਲ ਆ ਦਾ ਉਪਦੇਸ਼ ਸੰਤ ਗੁਰੂ ਨਿਸ਼ਟੀ ਉਹ ਦੇਣ ਰੋ ਠੀਕ ਹੈ ਜੀ ਸੰਤੋਖ ਤੱਕ ਦਾ ਉਪਦੇਸ਼ ਦਿੱਤੀ ਹੈ ਗਾਹ ਦਾ ਨਾਮ ਸਤਰਾ ਗੁਰੂ ਉਤਸਾਹੀ ਹੁਣ ਹੁੰਦਾ ਕਿ ਸੋਪਾਦਾਂ ਤਾਂ ਗਾਹੋਂ ਪੜਦਾ ਜੀ ਹੂੰ ਉਹ ਸੰਤੋਖ ਉਹਦੇ ਕੋਲ ਪਹਿਲਾਂ ਹੀ ਆ ਹੂੰ ਉਹ ਸੰਤੋਖ ਬਦਲ ਉਹਦਾ ਕੋਲ ਨਹੀਂ ਹੈ ਹੂੰ ਉਹ ਆਉਂਗੇ ਤੁੰਗਰੇ ਗੁਰੂ ਘਰ ਚੋਂ ਕੋਲ ਸੰਤੋਖ ਪੁਰਾ ਚਾਹੀਦਾ ਹੂੰ ਤੇ ਤਾਂ ਲੋ ਪਹਿਲਾਂ ਹੀ ਭਰੀਆਂ ਹੋਈਆਂ ਨੇ ਗਾਹ ਮਖਾਨੇ ਖੜਾ ਕਰਨਾ ਉੱਥੇ ਦਿਵਾ ਵੀ ਪਾਦੀਆਂ ਪਈਆਂ ਨੇ ਪਹਿਲੀਆਂ ਦਿਹਾ ਪਟਕੇ ਦੁਆਰਾ ਉੱਥੇ ਕੱਚਾ ਕੇ ਉਹ ਸੱਚ ਤੇ ਰੱਖਣੀ ਪਈ ਆ ਦਿਓ ਤੱਕ ਸੱਚ ਰੱਖੀ ਪਈ ਆ ਮੂਰਤੀ ਤੇ ਸੀਗੀ ਆਇਆ ਤੇ ਸੀ ਤਾਂ ਦਾ ਮਤਲਬ ਇਹ ਹੈ ਦਿਓ ਬਦਲਤੀ ਉਹਦੀ ਉਹਦੇ ਨੇ ਪਹਿਲਾਂ ਹੀ ਬਰੀ ਹੋਈ ਆ ਰਾਜ਼ੀ ਠੀਕ ਹੈ ਜੀ ਹਾਂ ਇਸ ਕਰਕੇ ਲਰਤੀ ਸੀ ਇਸ ਕਰਕੇ ਗੱਲ ਨਹੀਂ ਲਿਖੀ ਹੈ ਠੀਕ ਹੈ ਜੀ ਅੱਗੇ ਫਿਰ ਆਉਂਦਾ ਜੀ ਜ਼ਿਕਰ ਧੰ ਧੰ ਗੁਰੂ RAMDAS GURU ਜਿਨ ਪਾਰਸ ਪਰਸ ਮਿਲਾਇਓ ਦੇਖੋ ਗੁਰੂ ਆ ਫਿਰ ਗੁਰ ਹੈ ਹਾਂ ਜੀ ਧੰ ਧੰ RAMDAS GURU ਧੰ ਗੁਰੂ RAMDAS GURU ਹਾਂ ਤਾਂ ਤਾਂ ਗੁਰੂ ਤਾਂ ਤਾਂ ਉਹ ਪ੍ਰਪ੍ਰਿਸ਼ਾ ਗੁਰੂ ਹੈ ਜਿਹੜਾ RAMDAS ਦਾ ਗੁਰ ਹੈ ਹਾਂਜੀ ਇਹਨੂੰ RAMDAS ਦਾ ਗਿਆਨ ਹੈ ਜਿਹੜਾ ਗਿਆਨ ਗੁਰੂ ਤਾਂ ਤਾਂ ਦਾ ਹੈ ਤਾਂ ਗੁਰੂ ਉਹ ਹਾਂਜੀ ਜਿਨ ਪਾਰਸ ਪਰਸ ਮਿਲਾਇਓ ਜਿਨ ਪਾਰਸ ਪਰਸ ਮਿਲਾਇਓ ਉਸ ਵੇਲੇ ਗੁਰੂ ਜੀ ਕਹਿ ਦਿੱjie ਨਾ ਜੀ ਜੇ ਇਹ ਨਾ ਸਮਾਇਆ ਹੋਇਆ ਸ਼ਬਦ ਦੇ ਵਿੱਚ ਹੂੰ ਹੂੰ ਉਕਰ ਪਰਿਸ਼ਾਰ ਦੀ ਹਾਂਜੀ ਤਨ ਤਨ ਗੁਰੂ ਰਾਮਦਾਸ ਗੁਰ ਜਿਨ ਪਰਸ ਪਰਸ ਗੁਰੂ ਉਹ ਗੁਰੂ ਜਿਹੜਾ ਹੈਗਾ ਗਿਆਨ ਗੁਰੂ ਉਹ ਧੰਤ ਦੰਦ ਹੂੰ ਹੂੰ ਰਾਮਦਾਸ ਗੁਰਦਾ ਰਾਮਦਾਸ ਸਤ ਗੁਰੂ ਦਾ ਗਿਆਨ ਉਹ ਤਾਂ ਤਾਂ ਜਿਹਦੇ ਪਾਲ ਸਤ ਪ੍ਰਸੂਦਾ ਹੂੰ ਨਾਲ ਛੋ ਪ੍ਰਾਪਤ ਕਰ ਜਿਹਦਾ ਰਸ ਪ੍ਰਾਪਤ ਗਿਆਨ ਦਾ ਇਹ ਰਸ ਪ੍ਰਾਪਤ ਕਰਦਾ ਹਾਂਜੀ ਬੁਲਾ ਲਿਆ ਆਪਣੇ ਵਿੱਚ ਸ਼ਬਦ ਗੁਰੂ ਚ ਬੁਲਾ ਆਪਣੇ ਬਿੱਚੇ ਲਈ ਇਨਕਲ ਇਹ ਇੱਥੇ ਪੰਜਵਾਂ ਸਵਈਏ ਸਮਾਪਤ